ਸ਼ਲੋਕ ਮਹੱਲਾ ਚੌਥਾ ਤਾਕਤ ਜਾਏ ਨਿਵੇ ਮਨ ਖੋਟੇ ਕੂੜ ਕੂੜ ਯਾਰੀ ਜਿਹੜੇ ਸਾਧਦੇ ਇੱਕ ਜਿਹੜਾ ਮਨ ਸੰਤ ਹੈ ਹਾਂ ਗੁਰਮਤ ਤੋਂ ਬੱਕਰੀਆਂ ਜਿਹੀ ਉਹ ਦੇ ਉਹਨਾਂ ਨੂੰ ਗੁਰਮਤ ਅਨੁਸਾਰ ਸਾਕਤਤਾ ਵੀ ਮਤਵ ਦੇਉ ਹੈ ਜਿਹੜਾ ਏ ਮਨਤਾ ਜੱਬ ਲੱਕ ਜਾਣੇ ਮੈਂ ਕਿਛ ਕਰਤਾ ਜਿਹੜਾ ਕਰ ਬਰੋਦ ਆਦਮੀ ਬਦਲਦਾ ਵੀ ਇੱਕ ਅਸੀਂ ਮੰਨਦੇ ਆ ਵੀ ਸਾਰਾ ਕੁਝ ਪਰਮੇਸ਼ਰ ਕਰਦਾ ਉਹਦਾ ਕੀਤਾ ਬਾਕੀ ਬਤਾ ਇਹ ਮੰਨਦੇ ਨੇ ਆਦਮੀ ਪੁੱਤ ਪਾਪ ਕਰ ਸਕਦਾ ਹੈ ਤੇ ਪੁੱਤ ਪਾਪ ਹੋ ਜਾਂਦਾ ਉਹਨੂੰ ਸਾਡਾ ਦੀ ਮਤਾਂ ਬੰਦੇ ਨੇ ਗੁਰਬਾਣੀ ਹੋਜੀ ਸਾਹਬ ਗੁਰੇ ਬਰਕਾ ਦੀ ਰੋਟੇ ਇੱਕ ਦਦੇ ਦੇ ਸਾਕੇ ਜਾ ਕੇ ਹੂੰ ਹੂੰ ਜੀਵੇਂ ਹੋ ਜਾਂਦੇ ਨੇ ਪਰ ਉਹ ਚ ਖੋਟ ਉਹਨਾਂ ਦੇ ਜਿਹੜੀ ਹੁੰਦੀ ਹੈ ਉਹ ਖੋਟ ਛੱਡਦੇ ਦੀ ਤਿਆਗਦੇ ਨਹੀਂ ਸਨ ਅੱਛਾ ਜੇ ਬ੍ਰਿਸ਼ੀ ਜਾਂਦਾ ਲਖਮੀ ਚੰਦ ਕਿਹਾ ਹੋਇਆ ਕੁਰਬਾਨੀ ਦੀ ਬਾੜ ਚ ਖੋਟੇ ਆਕੀ ਦਲ ਭਾਰ ਹੈ ਬਨ ਭਾਰੋ ਵਿੱਚ ਗੁਰੂ ਦਾਈ ਪਰ ਦਿਲ ਚੋਂ ਖੋਟ ਨਹੀਂ ਛੱਡੀ। ਠੀਕ ਹੈ। ਕਹਿੰਦੇ ਬਚਨ ਦੀ ਬੰਦਿਆ ਗੁਰਬਾਣੀ ਨੂੰ ਬੰਦਿਆ ਦੀ। ਸਾਖਤ ਲੋਕ ਜਿਹੜੇ ਨੇ ਉਹ ਮੰਨਦੇ ਨੇ ਮੱਥਾ ਵੀ ਟੇਕ ਦਿੰਦੇ ਨੇ। ਅਸੀਂ ਸਾਰੇ ਸਾਖਤਾਂ ਸੁਣਦੇ ਆ ਬਾਣੀ ਨੂੰ ਮੰਨਦੇ ਨਹੀਂ। ਅੱਛਾ ਨੂੰ ਛੱਡ ਕੇ, ਸਿੱਖ ਨੂੰ ਛੱਡ ਕੇ ਸਾਰੇ ਸਾਖਤ ਹੋ ਗਏ। ਬਸ। ਉਹ ਸਿੱਖਾਂ ਦੇ ਘਰੇ ਪਹਿਲਾ ਹੋਏ ਨੇ। ਜਾ ਗੁਰੂ ਘਰ ਦੇ ਵਿੱਚ ਪੈਦਾ ਹੋਇਆ ਅਨੁਸਾਰਤ ਬੰਦੀ ਹੈ ਬੰਦੀ ਤੇ ਫਿਰ ਹੋਰ ਤਾਂ ਦੂਰ ਦੀ ਗੱਲ ਆਹ ਗੁਰ ਕਹੇ ਉਠੋ ਮੇਰੇ ਭਾਣ ਬਹਿ ਜਾਏ ਕੁਸਰ ਬਗਲਾਰੇ ਅੱਜੋ ਗੁਰੂ ਬਚਨ ਕਹਿ ਰਹੇ ਨੇ ਵੀ ਭਈਆ ਕਰੋ ਉਹ ਬੁੱਧੂ ਐਂ ਕੱਲਾਂ ਚਾਹੀਦੇ ਚਾਹੀਦਾ ਉਹ ਸੁਣ ਲੈਣਾ ਕੁਸਰ-ਮੁਸਰ ਆਪਣੀ ਕੱਲਾਂ ਦੱਸੋ ਤਕਬੀਰਦਾਰੀ ਹੈ ਕਿ ਵੀ ਹੋ ਸਕਦਾ ਹੁਣ ਕਹਿੰਦੇ ਤਾਂ ਠੀਕ ਹੈ ਪਰ ਹੁਣ ਇਹ ਕਿਤੇ ਪੋਸੀਬਲ ਹੈ ਆ ਗੋਸਰ ਮੋਸਰ ਦੀ ਕਰਕੇ ਆਪਣਾ ਮਦੰਦ ਗੁਰ ਸਿੱਖਾ ਅੰਦਰ ਚੁਣ ਬਾਣੀ ਨੂੰ ਗੁਜ਼ਵੇ ਹੋ ਅਧੜ ਹੋ ਜੋ ਗੁਰੂ ਨੇ ਕਹਿਤਾ ਉਹ ਮੰਨ ਨਹੀਂ ਪਊਗਾ ਪਵ ਸੰਗਤਰ ਜੋ ਕੇ ਅਲੱਗ ਕਰ ਲੈ ਛੱਟੇ ਗਏ ਜੋ ਕਿਤਾ ਅੰਦਰ ਸਤਗੁਰ ਵਰਤਦਾ ਚੁਣ ਕੱਡੇ ਲੱਦੋ ਵਾਰੇ ਜੋ ਗੁਰਬਚਨ ਕਹੇ ਉਹ ਵਰਤਦਾ ਉਹ ਹਾਜ਼ਰ ਹਾਜ਼ਰ ਹਰ ਵਕਤ ਬੱਤ ਕੀ ਉਹ ਪਾਣੀ ਦਾ ਬਚਨ ਵਰਤਦਾ ਤਾਂ ਵਰਤਦਾ ਸਤਗੁਰ ਦਾ ਕਹੇ ਦੇ ਬਤਾ ਉਹ ਨੇ ਉਹ ਇਹਨੂੰ ਕਹਿੰਦੇ ਨੇ ਉਹਨਾਂ 'ਚ ਅੰਦਰ ਵਰਤਦਾ ਕਿਉਂਕਿ ਮੰਨਦੇ ਆਪਣੀ ਪਰਜੀ ਦੀ ਰਹਦੀ ਹਾਂਜੀ ਕੋਈ ਅੰਕੋ ਚੁੱਕੇ ਬਹਿ ਮੂੰਹ ਛੁਪਾਇਨ ਨਾ ਰਲਨੀ ਖੋਟੇ ਆਰੇ ਖੋਟੇ ਜੇਦੀ ਹਾਂ ਕੋੜਿਆ ਨਾਲ ਚੌਧਰ ਦੇਦੀ ਅੱਗੇ ਪਿੱਛੇ ਓਨਾ ਦੇ ਲੋਕ ਪਲੋਕ ਚ ਉਹਨਾਂ ਨੂੰ ਕੋਈ ਦੱਲਦੀ ਕੋਈ ਭੈ ਜੀ ਠੀਕ ਜਿੱਤੇ ਪੂਰੇ ਆ ਰਹੇ ਆਂ ਭੁੱਖ ਹੈ ਉਹ ਆਹਦੇ ਅੰਦਰ ਇਹ ਹੀ ਭੁੱਖ ਦੀ ਹੁੰਦੀ। ਉਹ ਆਹ ਤਾਂ ਜ਼ਾਤ ਦੀ ਭੁੱਖ ਤਾਂ ਹੁੰਦੀ ਐ। ਇਹਨੂੰ ਕਹਿੰਦੇ ਭੁੱਖਿਆ ਭੁੱਖ ਨਾਲ ਉਸਲੇ ਜੇ ਪਰ ਨਾ ਦੁਨੀਆ ਪਰ। ਦੀ ਭੁੱਖ ਦੀ ਹੁੰਦੀ। ਦੁਨੀਆਵੀ ਵਧਿਆਏ ਦੀ ਚਾਲਾਂ ਸਾਦੀ ਹੁੰਦੀ। ਉਹਨਾਂ ਦੇ ਵਿੱਚ ਉਹਨਾਂ ਦਾ ਦੇਸ਼ੀ ਕੋਣ ਬਿਲਕੁਲ ਇੱਕਦਮ 180 ਡਿਗਰੀ ਐ ਉਲਟ। ਕੂੜੇ ਆਰਿਆਂ ਨਾਲ ਤੇ ਗੁਰੂ ਸਿੱਖਾਂ ਨਾਲ ਸੱਚ ਆਰਿਆਂ ਨਾਲ 180 ਡਿਗਰੀ ਦਾ ਫਰਕ। ਉਹਨਾਂ ਦਾ ਪਛਮਰੂ ਇੱਕ ਦਾ ਦਾ ਪੱਖ ਤੋਂ ਉੱਥੇ ਨਹੀਂ ਜਾਏ ਕੂੜ ਲੈਣ ਪੇਡਾਰੇ। ਦਾ ਮਤਲਬ ਹੈ ਖਰਲ। ਅੱਛਾ ਜੀ। ਉਹਦੀ ਖਰਾਗ ਉਹ ਨਹੀਂ ਹੁੰਦੀ। ਜਾਨੀ ਭੇਡਾਂ ਜਿਹੜੀਆਂ ਨੇ ਗੰਦਗੀ ਖਾਦੀਆਂ ਨੇ। ਅੱਛਾ ਜੀ। ਬਾਏ ਜਿਹੜੀ ਬਾਏ ਨੂੰ ਸਿਰ ਬਿਖ ਕੇ ਆਇਆ। ਦੀ ਜਿਹੜੀ ਭੁੱਖ ਹੈ ਉਹ ਬਾਆ ਦੀ ਹੈ। ਉਹਨਾਂ ਦੇ ਕੋ ਖ਼ਦ੍ਦਾਬ ਦੀ ਹੁੰਦੀ ਹੈ। ਨਾਮ ਦੀ ਦੂਰਦ੍ਰਿਸ਼ਟੀ ਹੁੰਦੀ ਹੈ। ਇਹ ਲੰਬੀ ਨਜ਼ਰ ਦਿਹਾਲੀ ਹੈ। ਉਹ ਜੇ ਭੇਂਟ ਖੰਡੇ ਵਿੱਚ ਆਪੂ ਵੀ ਜ਼ਮੀਰ ਤੇ ਰੁਕੋਦੀ ਲੰਬੀ ਨਜ਼ਰ ਹੀ ਹੋ ਪਊਗਾ। ਹਾਂਜੀ। ਜੇ ਸਾਖਤ ਨਰ ਖਾਵਾਈਐ ਲੋਚੀਏ ਬਿਕ ਕੱਢੈ ਮੁਖੁ ਗੁਲਾਰੇ। ਨਾਲ ਉਹ ਜਦ ਖੋਲਦੇ ਨੇ ਲੋ ਫੇਲੀ ਗਿਆਨ ਕਰਦੇ ਨੇ ਜੋ ਵੀ ਕੁਝ ਧਰਮ ਦਾ ਪ੍ਰਚਾਰ ਕਰਦੇ ਨੇ ਉਹ ਜ਼ਹਿਰ ਉਹਨਾਂ ਦੇ ਮੂੰਹ ਚੋਂ ਨਿਕਲਦੀ ਹੈ ਇਹਦੀ ਗੁਰਮਤ ਦਾ ਵਿਰੋਧ ਕਰਦੇ ਨੇ ਉਹ ਕਹਿਣ ਦਾ ਮਤਲਬ ਇਹ ਹੈ। ਮੋਟੀਆਂ ਹੁੱਡੀਆਂ ਗੱਲਾਂ ਕਰਦੇ ਨੇ ਫਰੀਦ ਵੀ ਹੋਈ ਕਹਿੰਦਾ ਜੋ ਤਨ ਮਾਲ ਨੂੰ ਘੂਕੀਓ ਇਹਨਾਂ ਦੀ ਮਾਰੀ ਘੂਬ। ਉਹ ਗੱਲ ਕਹਦੇ ਨੇ ਐ ਵੀ ਮੈਨਾ ਦੀ ਗੱਲ ਐਵੀਂ ਕਹੇੜੀ। ਤੁੱਕਾ ਉਹਨਾਂ ਅਸੀਂ ਤਾਂ ਬੁਲਾਏ ਬੋਲਣ ਆਏ ਸੀ ਤਾਂ ਬੋਲ ਨਹੀਂ ਸਕਦੇ ਨਾ ਆਪਣੀ ਮਰਜ਼ੀ ਨਾਲ ਉਹ ਆਪਣੀ ਮਰਜ਼ੀ ਨਾਲ ਬੋਲਦੇ ਨੇ ਸਾਖਤ ਇਹ ਨਹੀਂ ਉਹ ਸੰਦਲ ਤੋਂ ਗੱਲ ਕਰ ਰਿਹਾ ਹੈ ਸਾਖਤ ਬੋਲਦਾ ਉਹ ਜ਼ਹਿਰ ਗੁਰਦਾ ਨਾਲ ਬੋਲਦਾ ਉਹ ਉਹ ਨਾਲ ਬੋਲਦਾ ਇਹ ਜੇ ਸੱਚ ਵੀ ਕਹਤਾ ਤਾਂ ਉਹ ਨੂੰ ਪਰਣਾ ਲੱਗਦਾ ਕੋਈ ਗੁਰਾ ਉਹ ਫਿਰ ਉਹਦੇ ਵਿਰੋਧ ਦੇ ਵਿੱਚ ਕੋਈ ਬਹੁਤ ਉਲਟੀਆਂ ਸਿੱਧੀਆਂ ਗੱਲਾਂ ਕਰਦਾ हर ਸਾਖਤ ਸੇਤੀ ਸੰਗ ਨਾ ਕਰਿਓ ਓਏ ਮਾਰੇ ਸਿਰਜਣ ਹਾਰੇ ਆ ਇਸ ਕਰਕੇ ਗੁਰੂ ਖਾਨ ਕਹੇ ਗੁਰੂ ਖਾਨ ਕਹੇ ਵੀ ਤੁਸੀਂ ਸਾਖਤਾਂ ਦੇ ਆਂ ਸਾਖਤਾਂ ਦੀਆਂ ਸੰਗਤ ਹਰ ਜਿਹਨਾਂ ਨੂੰ ਸ੍ਰੀਖਤ ਕਰਦਾ ਜਿਹੜਾ ਹਰ ਸ਼ਕਤ ਹੈ। ਅੱਛਾ ਜੀ। ਸ੍ਰੀਖਤ ਕਰਨ ਵਾਲਾ ਸ਼ਕਤ ਹੈ। ਬਰਾਬਰੀ ਕਰਦਾ ਜਿਹੜਾ। ਸਭ ਨੂੰ ਕਰੇ ਬਰਾਬਰੀ। ਉਹ ਸ਼ਕਤ ਹੁੰਦਾ। ਅੱਛਾ ਜੀ। ਜਿਹੜਾ ਗੁਰੂ ਬਣਦਾ ਨਾ ਗੁਰੂ ਕਹੋਂਦਾ ਹੈ। ਉਹ ਕੁਰਬਾਨੀ ਸ਼ਕਤ ਹੈ। ਤੇ ਗੁਰੂ ਪਰਮੇਸ਼ਰ ਹੈ। ਗੁਰਮੁਖ ਬਣਦਾ ਗੁਰੂ ਦੀ ਬਣਦਾ ਇਸ ਕਰਕੇ ਜਿਹੜਾ ਗੁਰੂ ਬਣ ਗਿਆ ਉਹ ਤਾਂ ਸਾਡਾ ਤਾਂ ਆਪੇ ਹੋ ਗਿਆ ਪਰਮੇਸ਼ਰ ਦੀ ਬਰਾਬਰੀ ਕੱਲ ਦੀ ਖਤਮ ਹੋ ਗਈ ਬਰਾਬਰੀ ਫਿਰ ਗੈਰ ਪਾਏ ਹੋਈ ਜੀ ਮਾਰੇ ਸਿਰਜਣ ਹਾਰੇ ਉਹ ਸਿਰਜਣ ਹਾਰੇ ਦੇ ਮਾਰੇ ਹੋਏ ਸਮਝੋ ਪਰਮੇਸ਼ਰ ਦੀ ਹੋ ਮਹਿਲੀਆਂ ਉਹਦੇ ਤੇ ਉਹਦੇ ਉਹਦੇ ਪਰਮੇਸ਼ਰ ਦੀ ਦੀਨਾ ਸਿੱਧੀ ਦੀ ਹਾਲ ਤੇ ਹੈ ਉਹਨਾਂ ਤੇ ਸਮਝੋ ਬਾਹਰੇ ਪੈ ਗੁਆਰ ਪਈ ਹੋਈ ਔਰ। ਹੋਜੀ। ਹਾਂਜੀ ਜਿਸ ਕਾ ਇਹ ਖੇਲ ਸੋਈ ਕਰ ਵੇਖੈ ਆ ਅਸੀਂ ਕੋਈ ਕਿਸੇ ਨੂੰ ਇਸ ਚਿਰੋਲ ਖਾਤਰ ਜਾਂ ਕਿਸੇ ਹੋਰ ਦੁੱਧ ਭੌਰ ਨਾਲ ਗੱਲ ਨਹੀਂ ਕਹੀ। ਅਸੀਂ ਤਾਂ ਉਹ ਕਹੀ ਆ ਜੋ ਸਿਰਜਣ ਵਾਲੇ ਦੀ ਖੇਡ ਵਰਤ ਰਹੀ ਹੈ ਲੋ। ਅਸੀਂ ਜੋ ਦੇਖ ਰਹੇ ਹਾਂ ਕਹੀ ਹੈ। ਥੋੜੀ ਸੰਤਨ ਕੀ ਸਾਚੀ ਸਾਖੀ ਸੋ ਬੋਲਦੇ ਜੋ ਪੇਖੇ ਅੱਖੀ ਜੋ ਸਾਨੂੰ ਦਿਖ ਰਿਹਾ ਹੈ ਖੇਡ ਜੋ ਅਸੀਂ ਸਮਝ ਰਹੇ ਹਾਂ ਜੋ ਸਾਹਮਣੇ ਹੈ ਸਾਡੇ ਖੇਡ ਕਿ ਕਵੀਰ ਪ੍ਰਗਟ ਭਈ ਖੇਡ ਚੱਲ ਜਾਲੇ ਸਮਝ ਭਾਗੀ ਤਾਂ ਸੀ ਕਿ ਜੋ ਹੈ ਵਰਤ ਰਹੀ ਹੈ ਕਿ ਸਿਰਜਣ ਹਾਰੇ ਨਹੀਂ ਉਹਦੀ ਬੁੱਧੀ ਪੁੱਟੀ ਕਰਕੇ ਉਲਟ ਪਾਸੇ ਲਾਈ ਹੋਈ ਜਨ ਨਾਨਕ ਨਾਮ ਨਾਂ ਨਾਂ ਕਰਕੇ ਜਾਣਦੇ ਦੇਦੇ ਹੋਦੇ ਨਾਂ ਕਹਿੰਦਾ ਉਹ ਲੋਗ ਉਹਨਾਂ ਨੂੰ ਸੁਭਾਰਦਾ ਹੈ ਉਹਨਾਂ ਨੂੰ ਸ਼ੁੱਧ ਕਰਦਾ ਉਹਦੇ ਹਿਰਦੇ ਉਹਨਾਂ ਦੀ ਕਾੜਤ ਵਧੀਆ ਘੜਦਾ ਹੈ ਉਹਨਾਂ ਦਾ ਰੂਪ ਵਧੀਆ ਨਖਾਸ਼ਦਾ ਤੇ ਇਹਨਾਂ ਤੇ ਬਾਹਰ ਪੈਂਦੀ ਹੈ ਠੀਕ ਹੈ ਇੱਕ ਰੂਪ ਕੁਲ ਖੜੀ ਇਹਦੀ ਅ ਹੋ ਜਾਂਦੀ ਹੈ ਰੂਪ ਵੀ ਪਿਗੜਦਾ ਰੰਗ ਵੀ ਪਿਗੜਦਾ ਹੈ ਦਾ ਠੀਕ ਹੈ ਰੰਗ ਤੇ ਆਉਣਾ ਉਲਟਾ ਅਮਝ ਲਦਾ ਸਤਿਗੁਰ ਦਾ ਰੋਜੀ ਮਹੱਲਾ ਚੌਥਾ ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਰਤਾ ਰਿਆ ਜਿਹੜਾ ਸਤਿਗੁਰ ਪੁਰਖ ਹੈ ਲੋਕ ਕੁੱਤਾ ਤਾਂ ਅਸਬੀਰ ਹ ਹ ਪਰ ਉਹਦੀ ਖੇੜ ਬੁੱਧ ਕੀ ਬੁੱਧੀ ਤੋਂ ਪਰੇ ਪਰੇ ਦੀ ਹੁੰਦੀ ਜਿਹੜੇ ਨੇ ਨਾ ਉਹ ਨਾਨਕ ਨੂੰ ਜਾਂ ਭਗਤਾਂ ਨੂੰ ਸਮਝ ਨਹੀਂ ਸਕੇ ਹਮ ਆਗਾਮ ਹੁੰਦਾ ਹੈ ਮੁਖੀਪੀ ਤੋਂ ਪਰੇ ਜਾ ਜਿਹੜੀ ਗੱਲ ਹੋਵੇ ਤੇ ਕਿਰਪਾ ਹੋ ਜਾਵੇ ਕੋਈ ਸਮਝ ਆ ਜਾਵੇ ਆ ਸੁਭਜਿਤ ਦੀ ਕੋਸ਼ਿਸ਼ ਕਰੇ ਫਿਰ ਸਭਿਲ ਲੈ ਹਾਂ ਇਹ ਵਕਈ ਠੀਕ ਹੈ ਇਹ ਉੱਚੀ ਅਵਸਥਾ ਵਾਲਾ ਤਾਂ ਅੱਛਾ ਪਹਿਲਾ ਜਿਹੜਾ ਜੀ ਹੋ ਜਾਏ ਹੈ ਅੱਛਾ ਪਰ ਉਹਦੇ ਜਿਸ ਅੰਦਰ ਜਿਸ ਅੰਦਰ ਹਰ ਉਰਤਾ ਰਿਹਾ ਕਿ ਉਹਨੇ ਆਪਣੇ ਆਪ ਹਿਰਦੇ ਵਿੱਚ ਸੱਚ ਨੂੰ ਦਾਰਦ ਕੀਤਾ ਹੋਇਆ ਹਰ ਕਈ ਸਥਿਤੀਆਂ ਦੇ ਵਿੱਚ ਲਫਜ਼ ਵਰਤਦਾ ਹੈ ਹਰਾ ਭਰਾ ਹਿਰਦਾ ਕਰਨ ਵਾਲਾ ਹਰ ਹੈ ਸੱਚ ਜਾਰੇ ਹਰ ਸੱਚ ਤੇ ਵਰਕਦੀ ਹੈ ਠੀਕ ਹੈ ਹਾਂ ਜਿਹੜਾ ਜੋਤ ਹੈ ਖਰਾ ਕਰਦੀ ਹੈ ਖਰਾ ਕਰਦੀ ਕੋਈ ਨਾ ਸਕਈ ਜਿਸ ਵੱਲ ਸਿਰਜਣ ਹਾਰਿਆ ਆ ਦੇਖ ਲਓ ਹੁਣ ਜਿਹੜਾ ਸਤ ਗੁਰੂ ਹੈ ਉਹ ਦੇ ਸਕਦਾ ਆਪਣੇ ਆਪ ਕੋਈ ਕਲੇਸ਼ੀਰ ਵੀ ਗੁਰਬਾਤ ਦੀ ਜਾਣਕਾਰੀ ਤੋਂ ਜਾਂ ਪਹਿਲਾਂ ਜਾਣਕਾਰੀ ਹੈ ਤੋਂ ਐਵੇਂ ਹਰ ਕੋਈ ਨਹੀਂ ਉਹ ਤਾਂ ਸ਼ਬਦ ਗੁਰੂ ਨਾਲ ਜੁੜ ਸਕਦਾ ਤੁਰਕੀ ਬਾਲੀਦਾਰ ਕੋਲ ਸਮਾਧੀ ਲਾ ਕੇ ਸੁਣਦੇ ਸੀ ਨਾ ਕਹਿੰਦੇ ਸਾਨੂੰ ਸ਼ਬਦ ਸੁਣਦਾ ਨਾਲ ਇਸ਼ਾਰਾ ਕਰਕੇ ਗੱਲਾਂ ਕੀਤੀ ਸੀ ਜਿਹੜੇ ਕੁਝ ਹੋਜੀ ਸੰਜੋ ਹਰ ਭਗਤੀ ਹੈ ਜਿਤ ਕਾਲ ਕੰਟਕ ਮਾਰ ਬਿਡਾਰੇ ਗੁਰੂ ਦੇ ਕੋਲ ਜਿਹੜਾ ਖੜਗ ਹੈ ਉਹ ਗਿਆਨ ਇਹ ਜੇ ਕਾਲ ਜਿਹੜਾ ਹੈ ਅਟਕ ਕਾਲ ਦਾ ਜਿਹੜਾ ਭੈ ਹੈ ਅਟਕ ਭੈ ਰੂਹ ਹੈ ਇਹਨਾਂ ਦੀ ਬਹੁਤ ਆ ਭੈ ਕਾਲ ਦਾ ਭੈ ਹੈ ਸਵੇਰ ਦਾ ਭੈ ਹੈ ਕੋ ਸਮਝਦਾ ਅਸਲ ਸਰੀਰ ਦੇ ਉੱਤੇ ਆਤਮਾ ਤੇ ਕੋਈ ਅਸਰ ਨਹੀਂ ਸਮਝਦਾ ਆਤਮਾ ਅਬਰ ਹੈ ਇਸ ਕਰਕੇ ਇਹਨੂੰ ਆਤਮਾ ਦੀ ਯਾਰ ਸਰੀਰ ਦੀ ਵਾਇਆ ਦੀ ਸਮਝ ਆ ਜਾਂਦੀ ਹੈ ਅਗਾੜਟ ਕਰਕੇ ਦੋਹਾਂ ਨੂੰ ਦੇਖ ਲੈਂਦਾ ਉਹ ਤੇ ਫਿਰ ਉਹ ਜਿਹੜਾ ਘਾਰਿਆ ਨੂੰ ਆ ਸਮਝੋ ਪਰਮੇਲ ਜਗੁਣ ਫਲਦਾ ਉਹ ਤਾਂ ਕੱਟਿਆ ਜਾਂਦਾ ਉਹ ਤਾਂ ਪਰਮੇਲ ਜਗੁਣ ਫਲਦਾ ਜਾਨੂੰ ਬੰਦ ਗਿਆ ਗੁਰ ਸਾਖੀ ਜਗਦੀ ਕਾ ਰੱਖਣ ਹਾਰਾ ਹਰ ਆਪ ਹੈ ਸਤ ਗੁਰੂ ਕੈ ਹਰ ਸਭ ਉਬਾਰਿਆ ਜਿਹੜੇ ਹਿਰਦੇ ਚ ਹਾਰ ਹੈ ਉੱਥੇ ਹੀ ਗਿਆਨ ਹੈ ਉੱਥੇ ਹੀ ਸ਼ਬਦ ਗੁਰੂ ਹੈ ਸ਼ਬਦ ਗੁਰੂ ਔਰ ਜਿਹੜਾ ਇੱਥੇ ਆ ਕੇ ਅੰਤ ਰੋਣੋਂ ਦਾ ਬਿਟ ਗਿਆ ਬੈਠੇ ਕੋਈ ਜਾਂ ਹੋ ਕੇ ਕੋਈ ਤਾਂ ਉੱਗਵੇ ਉੱਥੇ ਜਾ ਕੇ ਫਿਰ ਫਰਕ ਹੈ ਵੀ ਹੈ ਵੀ ਅੱਛਾ ਜਿਵੇਂ ਸਮੁੰਦਰ ਔਰ ਹੋ ਗਏ ਉਹਨਾਂ ਫਿਰ ਸਮੁੰਦਰ ਕਹਿ ਦੋ ਚਾਹੇ ਤੁਸੀਂ ਗੁਰੂ ਕਹਿ ਦੋ ਉਹਦੇ ਦੋਏ ਦੋ ਚੱਲਣਗੇ ਠੀਕ ਹੈ ਜੀ ਸਤਿਗੁਰੂ ਕੈ ਪਿੱਛੇ ਹਰ ਸਭ ਉਬਾਰਿਆ ਸਤਿਗੁਰੂ ਆਦਮੀ ਨੂੰ ਤਾਂ ਕਹਿੰਦਾ ਇੱਥੇ ਕਿਉਂਕਿ ਉਹ ਨਾ ਜਿਬਰਵੰਤ ਪਰੇ ਚਲਾ ਗਿਆ ਅਸਲ ਦੇ ਵਿੱਚ ਸਰੀਰ ਕਰਕੇ ਉਹ ਜ਼ਰੂਰ ਸਰੀਰ ਜਾਊਗਾ ਜ਼ਰੂਰ ਸਰੀਰ ਨਾਲ ਜੰਤੂ ਲੁਕਣਾ ਪਰਵਾਨੀ ਦੀ ਬਸਤੀ ਉਹ ਨਹੀਂ ਹੋ ਪਰ ਇਹਨੂੰ ਸੁਝਾਉਣ ਦਾ ਜਿਹੜਾ ਹੈ ਔਖਾ ਹੈ ਪਰ ਸਭੇ ਦੇ ਨਾਲ ਬੰਨਣਾ ਔਖਾ ਜਿਹੜੀ ਗੱਲ ਸਾਡੀ ਸਮਝ ਤੋਂ ਪਰੇ ਉਹ ਬੰਨਣ ਚ ਵੀ ਬਹੁਤ ਔਖੀ ਹੈ ਬਹੁਤ ਸਾਰੀਆਂ ਗੱਲਾਂ ਪਰ ਬੰਨ ਜਾਈ ਦੇ ਇਸ ਸਟੇਜ ਦੇ ਦਾ ਲੈਬ ਸਤਿਗੁਰੂ ਕਾ ਰੱਖਣ ਹਾਰਾ ਹਰਾ ਹਰ ਸਤਿਗੁਰੂ ਹੁਣ ਕੀ ਬਣ ਗਏ ਉਹਨ ਮਾਜ਼ਰੇ ਦੀ ਇਲਾਕੇ ਜਿਹਨੇ ਹੁਕਮ ਦੇਲੇ ਹੁਕਮ ਨੇ ਮਾਰਨਾ ਸੀ ਉਹ ਹੁਕਮ ਤਾਂ ਹੁਣ ਬਚਾਉਣ ਵਾਲਾ ਹੈ ਜਿਹੜੀ ਤਲਵਾਰ ਵਟਾਈ ਸੀ ਹਾਂਜੀ ਉਹ ਤਲਵਾਰ ਦਾ ਰਾਖੀ ਤੇ ਖੜੀ ਹੋ ਗਈ ਆ ਤੇ ਫਿਰ ਮਾਜ਼ਰੇ ਵਾਲਾ ਤਾਂ ਕੋਈ ਰਿਹਾ ਹੀ ਨਹੀਂ ਕਹਿੰਦੇ ਸਤ ਗੁਰੂ ਕੇ ਹਰ ਸਭ ਬਾਰਿਆ ਕੀ ਭਾਵ ਦੀਦ ਭਰੋਸੇ ਤੇਰੇ ਸਭ ਪਰਿਵਾਰ ਚ ਅਸਲ ਵਿੱਚ ਦਾ ਵੀਰ ਪਿਆਲੇ ਇਹੀ ਗੁਰੂ ਹੈ ਉਹ ਕਹਿੰਦੇ ਮੈਂ ਕਹੀ ਰੱਖਿਆ ਬਣਿਆ ਵੀ ਆ ਗੱਲ ਕਰ ਲੋ ਤੁਸੀਂ ਪਰ ਮੈਂ ਨਹੀਂ ਕਿਹਾ ਚਾਹੇ કહਾਇਆ ਮੈਂ ਕਹ ਤਾ ਇਸ ਕਰਕੇ ਕਹੋ ਕਿ ਤੇਰੇ ਪਿੱਛੇ ਲੱਗੇ ਨਾ ਮੇਰੇ ਪਿੱਛੇ ਨਹੀਂ ਲੱਗੇ ਪੁਰੋ ਤੇਰੇ ਝੱਪਰ ਭਾਰ ਚਲਾਇਆ ਬੇਟੇ ਬੋਲ ਜਰੂਰ ਕਹਿਤਾ ਵੀ ਬੇੜੇ ਸਿੱਖੀ ਦੇ ਤੇ ਬਹਿ ਜਾਓ ਪਰ ਕਾਇਮ ਇਤੇ ਕਹਾਏ ਵੀ ਵਪਾਰ ਕਰੂਗਾ ਤੇਰਾ ਹੈ ਮੇਰਾ ਵੀ ਵਪਾਰ ਹੈਗਾ ਅੱਛਾ ਤੇਰੇ ਕਹਾਏ ਤੇ ਮੈਂ ਕਹਾ ਜਿਵੇਂ ਤੇਰੀ ਹੈ ਮੇਰੀ ਵੀ ਹੈ ਆਪਣੇ ਵਾਲੀ ਹੋਰ ਦੀ ਬਿੱਟੂ ਹੱਥ ਖਿੱਚਦੇ ਨੇ ਵੀ ਜੋ ਕੁਝ ਵੀ ਲਿਖਿਆ ਅੱਖਰ ਅੱਖਰ ਅਸੀਂ ਤਾਂ ਜਿਵੇਂ ਫਰਮਾਏ ਨੇ ਅੱਖਰ ਉਹ ਲਿਖ ਕਹਿੰਦੇ ਵੀ ਸਤਗੁਰ ਦੀ ਗੱਲ ਬੁੱਝ ਕੇ ਤੇਰੀ ਗੱਲ ਬੁੱਝ ਕੇ ਫਿਰ ਸ਼ਰੀ ਗੱਲ ਬੁੱਝ ਕੇ ਅਜਾ ਹਰਤਾਬ ਬਾਰੇ ਹਰਤਾ ਤਾਂ ਹਾਂ ਇਹ ਜਿਹੜਾ ਅਸੀਂ ਇਹ ਲੈ ਕੇ ਆ ਵੀ ਅਸੀਂ ਅਸੀਂ ਕਹਿੰਨਾ ਭਾਈ ਇਹ ਸੱਚਖੰਡ ਦੀ ਬਾਣੀ ਹੈ ਪਰਮੇਸ਼ਰ ਨੇ ਕਿਹਾ ਆ ਗੱਲ ਉਹਦੇ ਤੇ ਵਿਸ਼ਵਾਸ ਕਰੋ ਸਾਡੇ ਤੇ ਨੂੰ ਪੂਰੀ ਕੇ ਗੱਲ ਨੂੰ ਚੱਲ ਲੈ ਮਾਰੋ ਕਢਾਈ ਹੈ ਸਾਡੇ ਸਾਡੀ ਵੀ ਹੈਗੀ ਗੱਲ यो ने गल बन के चलेओ मेरी वदी केने चलेओ मेरे पीछे ना लगयो ठीक है जी जो मनदा चितवै पूरे सतगुरु का आप उपवन हारे मारिया जेड़ा सतगुरु है संसार तौर पे सतगुरु है गल तो परमिशन दी गल लोग ओनु है गए जो उन्हें जेड़ा ओला ਭਈ ਸਾਡੀ ਮਤ ਨੂੰ ਦੁਖਾਣ ਪਹਚਾਉਂਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਭਈ ਜਦ ਤੇ ਆਇਆ ਆਪੇ ਦੋਸਤ ਨੇ ਲੇਟ ਕਰਤਾ ਕਰਤਾ ਆਪਣਾ ਉੱਤੇ ਪਹਿਲਾਂ ਭਗਤ ਪੈਦਾ ਕਰਤੇ ਉਹ ਇਹ ਨਾ ਬੰਤਾ ਬਹੁਤ ਭੱਡੀ ਕੀਤੀ ਸਾਜੀ ਦੀ ਆ ਦੂਜੀ ਬੰਤਾ ਦੀ ਕੋਈ ਮੈਨੂੰ ਕਹੇ ਤਾਂ ਭਈ ਭਈ ਤੂੰ ਬੋਲਹਾ ਮੈਨੂੰ ਬਹ ਪਾਸ ਹੈ ਰਹੇ ਆਪਣੇ ਦੇ ਦੋਸਤ ਵੀ ਮਿਲਦਾ ਠੀਕ ਹੈ ਬੁਲਾਉਣਾ ਆ ਹੂੰ ਹੂੰ ਹੁੰਦੇ ਅਸੀਂ ਆ ਇਸ ਕਰਕੇ ਗੁੱਸਾ ਸਾਡੇ ਤੇ ਲੋਕਾਂ ਨੂੰ ਹੋੜੀਆਂ ਜਬੂਰੀ ਸੀ ਠੀਕ ਹੈ ਉਹ ਕਬੀੜ ਬਦਲ ਫਸਾਰ ਸ੍ਰੀਸ਼ਾਦਾ ਆਵਾਜ਼ ਆਉਂਦੀ ਹੈ ਲੋਕ ਕਹਿੰਦੇ ਕਹਿੰਦਾ ਅਸੀਂ ਕੋਈ ਨਹੀਂ ਕਹਿੰਦੇ ਉਹ ਕਹੋਦਾ ਠੀਕ ਹੈ ਜੀ ਪੂਰੀ ਫਰੀ ਬੁਲਾਏ ਕਹਿ ਰਹੇ ਨੇ ਜੋ ਮੰਨਦਾ ਚੁੱਤਵੇ ਪੂਰੇ ਸਤਗੁਰੂ ਕਾ ਸੋ ਆਪ ਉਪਾਵਨ ਹਾਰੇ ਮਾਰਿਆ ਸਮਝ ਲੋ ਤੇ ਇਹ ਬਚਾਊ ਕੌਣ ਠੀਕ ਹੈ ਜੀ ਜੇ ਪੈਦਾ ਕਰਨ ਵਾਲਾ ਇਹਨੂੰ ਮਾਰ ਦੇਵੇ ਜੇ ਬਾਹਰ ਜਾਏਗਾ ਬੱਚਾ ਮਾਰ ਦੇਣਾ ਆਪਣਾ ਹੁਣ ਕੋਣ ਬਚਾਊਗਾ ਇਹ ਗੱਲ ਹੋਵੇ ਹਰ ਨਾਨਕ ਅਗਮ ਵਿਚਾਰ ਆਗਲ ਕਹਿੰਦੇ ਹਰ ਤਰਗਾ ਦੇ ਵਿੱਚ ਹੋ ਰਹੀ ਹੈ ਉੱਥੋਂ ਸੁਣ ਕੇ ਦੱਸੀ ਹੈ ਅਸੀਂ ਇਹ ਐਂ ਬਤ ਕਹਿ ਲਿਓ ਵੀ ਅਸੀਂ ਕੋਈ ਝੂਠ ਬੋਲ ਕੇ ਆਇਆ ਕੋਈ ਸਾਨੂੰ ਕੋਈ ਠਾਰ ਮਾ ਕੋਈ ਦਰਗਾ ਦੇ ਵਿੱਚ ਜੋ ਵਰਤ ਰਿਹਾ ਸੋ ਨਾਨਕ ਆਕਸਣ ਆਵੇ ਨਾਨਕ ਦਾ ਆਸਕੇ ਸੁਣਾ ਰਿਹਾ ਜੋ ਵਰਤ ਰਿਹਾ ਦਰਗਾ 'ਚ ਸੋ ਬੋਲ ਜੋ ਪੇਖ ਅੰਕੀ ਉਹਨਾਂ ਨੂੰ ਸਾਨੂੰ ਦੱਸ ਰਿਹਾ ਸੀ ਦੱਸ ਲਿਆ ਕੋਈ ਬੰਦੂ ਕੋਈ ਨਾ ਬੰਦੂ ਹਾਂ ਕੌਣ ਦੀ ਸੱਚ ਸੁੱਤਿਆਂ ਜਿੰਨੀ ਆਰਾਧਿਆ ਜਾਂ ਉੱਠੇ ਤਾਂ ਸੱਚ ਚਵੇਂ ਆ ਦੇਖੋ ਪੌਣ ਸੁੱਤੇ ਪਏ ਸੁਪਨੇ ਦੇ ਵਿੱਚ ਕਰ ਲੈ ਸਭ ਹਾਂ ਸੁਪਨੇ ਵਾਲਾ ਆਦਮੀ ਦੀ ਸੁੱਤਾ ਬੰਦੇ ਹੁੰਦਾ ਕੋਈ ਜਾ ਸਕਦਾ ਆ ਜਿਹੜੇ ਜਿਨ੍ਹਾਂ ਨੇ ਕਹਿੰਦੇ ਸੁੱਤਿਆਂ ਆਰਾਧਨਾ ਕੀਤੀ ਹੈ ਜਿੰਨਾ ਚਿਰ ਨਾਮ ਦੀ ਨਾਮ ਸਿਮਰਨ ਉਹਨਾ ਚਿਰ ਵੀ ਜੋ ਪੂਰਾ ਜਾਂਦਾ ਨਹੀਂ ਹੋਰ ਅੱਛਾ ਜਿੰਨਾ ਚਿਰ ਸ਼ਬਦ ਗੁਰੂ ਨਾਲ ਸੁਰਤ ਚਾਰੇ ਪਦਾਰਥਾਂ ਤੋਂ ਵਿਲੇਸੋ ਅਵਸਥਾ ਬਣੀ ਜਾਂਦੀ ਦੋ ਪਦਾਰਥਾਂ ਦਾ ਵੀ ਸੁੱਤਾ ਹੈ ਜੀ ਸਾਡੇ ਨਾਮ ਦੇ ਵਿੱਚ ਉਹਦੇ ਦੇ ਕਰਨ ਉਹਨਾਂ ਦੇ ਵਿੱਚ ਕੁਝ ਦੇ ਵਿੱਚ ਨਾਮ ਜਿਹਾ ਰਹੇ ਸੁਪਨੇ ਚੋਂ ਪਰਣਾਏ ਕਿ ਜੇ ਭੁਖ ਦਿੱਖ ਸਹਰਾ ਉਹ ਕੁਝ ਨਾਲੂਏ ਸਿਕਰੇਸ ਤੇ ਸੁਪਨਾ ਵੀ ਦੇ ਵਿੱਚ ਆਦਮੀ ਬੋਲਦਾ ਜੀ ਉਹਦਾ ਬੜਾ ਹੁੰਦਾ ਐਵੇਂ ਨਾਮ ਦੀ ਜਦੋਂ ਅਸੀਂ ਗੱਲ ਕਰਦੇ ਆ ਸੱਚ ਦੀ ਗੱਲ ਕਰਦੇ ਆ ਵਿਆਖਿਆ ਕਰਦੇ ਆ ਪਹਿਲਾਂ ਪਹਿਲਾਂ ਬਿਲਕੁਲ ਪੂਰੀ ਸਾਤੇ ਸਹੀ ਵੀ ਅੱਖਿਆ ਹੁੰਦੀ ਉਹਨੂੰ ਬੜਾਉਣਾ ਕਹਿੰਦੇ ਆ बोलणा नहीं कहंदे बोलदा ज्यादा जल्द बुलाउदा हो ओडे बुलाउं तो पहला जेड़ा बोलदा ओ बड़ाया कहंदे दुर अच्छा okay. सुपरलेटिव ओ सच सच्चा याद रहया जी उदी राजमा दी व्यवस्था चलदी है हां जी ਆਕੇ ਉਹਨੇ ਮੇਰੇ ਨੂੰ ਦਾ ਨਾਮ ਦੀ ਆਵਾਜ਼ ਆ ਰਹੀ ਸੱਚ ਦੀ ਆਵਾਜ਼ ਆ ਰਹੀ ਸੀ ਉਹਨਾਂ ਨੂੰ ਆਪ ਜਲਪਤਾ ਲੱਗਿਆ ਵੀ ਇਹ ਸੱਚ ਇਹ ਹੈ ਠੀਕ ਹੈ ਵੀ ਵਾਕਿਆ ਹੀ ਸਾਡੇ ਕੋਲ ਉਹ ਨਾਮ ਦੇ ਵਿੱਚ ਜਿਹੜਾ ਕਹਿੰਦਾ ਦੁੱਧ ਪੀਏ ਗੋਵਿੰਦ ਦੇ ਦੁੱਧ ਪੀਏ ਦੁੱਧ ਪੀਏ ਮੇਰਾ ਮਨਪਤੇ ਉਹ ਵੀ ਇਹੀ ਗੱਲ ਕਹਿ ਰਿਹਾ ਹਾਂ ਜੇ ਮੈਨੂੰ ਤਸੱਲੀ ਹੋ ਜਾਵੇ ਹਾਂ ਮੈਂ ਇਹ ਆਪਣੇ ਅੰਦਰ ਅੰਤਰਾਤਵਾਂ ਨੂੰ ਕਹਿ ਵੀ ਜੇ ਤੂੰ ਕਹਿ ਲੈ ਵੀ ਜੋ ਮੈਂ ਕਿਹਾ ਤਾਂ ਮੈਨੂੰ ਤਸੱਲੀ ਹੋ ਜਵੇ ਮੇਰੇ ਕੋਲੋਂ ਤਾਂ ਮੈਨੂੰ ਰੋਹ ਮਿਲ ਗਿਆ ਗੁਰਮੁਖ ਸੱਚ ਰਵੇਂ ਜਗ ਦੇ ਵਿੱਚ ਵਿਰਲੇ ਹੁੰਦੇ ਨੇ ਕੋਈ ਸਮਝ ਲਓ ਗੱਲ ਜਾਣ ਲਓ ਤੁਸੀਂ ਬਈ ਦੇ ਨਾਲ ਜਾਂਦੇ ਨੇ ਉਹ ਬਹੁਤ ਹੈ ਵਿਰੁੱਧ ਹੈ ਠੀਕ ਹੈ ਉਹ ਉਹ ਜਣਾ ਕੋਈ ਨਾ ਕੋਈ ਬਿੱਲੇ ਬਿੱਲੇ ਹੁੰਦੇ ਨੇ ਹਰ ਜੁਗ ਜੁਗ ਭਗਤੋਂ ਪਾਇਆ ਸਭੇ ਸਭੇ ਸਰ ਤਪ ਕਰਦਾ ਰਹੇ ਹਾਂ ਬਲੇਹਾਰੀ ਤਿੰਨ ਕੋ ਜੇ ਅੰਨ ਦਿਨ ਲਵੇ ਅਸੀਂ ਕੁਰਬਾਨ ਜਾਂਦੇ ਜਿਹਨਾਂ ਨੂੰ ਬਿਰਲਾਤ ਸੱਚ ਦੀ ਇੱਛਾ ਜਿਹਦੇ ਤੇ ਜਾਗਦੀ ਰਹਿੰਦੀ ਭੁੱਖ ਰਹਿੰਦੀ ਹੈ ਨਾਬਦੀ ਭੁੱਖ ਜਿਹਨਾਂ ਦੇ ਅੰਦਰ ਦਿਨ ਰਾਤ ਰਹਿੰਦੀ ਹੈ ਉਹਨਾਂ ਦੇ ਕੁਰਬਾਨ ਨਾਮ ਦੀ ਇੱਛਾ ਜਿਹਨਾਂ ਦੇ ਅੰਦਰ ਚਾਹੇ ਉਹਨਾਂ ਨੂੰ ajo ਚਾਹੇ ਨਾ ਬਲਿਆ ਉਹ ਲੱਭਦੇ ਹੀ ਫਿਰਦੇ ਨੇ ਚਾਹੇ ਉਹਨਾਂ ਦੇ ਮਨ ਕਰਕੇ ਦਿਲ ਕਰਕੇ ਛੱਤ ਵਿਖਾ ਲੱਗਦਾ ਕਿੱਡਾ ਲੱਗਦਾ ਸ਼ਾਂਤੀ ਮਿਲਦੀ ਹੈ ਸੱਚ ਨੂੰ ਜਿਹੜੂ ਉਹ ਹਮਰਦਾ ਜੇ ਨੂੰ ਸੱਚ ਸੁਣ ਕੇ ਬੱਸ ਉਹ ਸੱਚੀ ਕਰਗਾ ਕਿ ਸਮਝਿਓ ਗਏ ਹੋਏ ਬੰਦੇ ਰੋਣਾਂ ਬੈਠੇ ਦੱਸੋ ਤੁਸੀਂ ਓਏ ਉਹ ਕੋਈ ਦਰਗਾਹ ਕੋਈ ਐਸੀ ਗੱਲ ਨਹੀਂ ਹੈ ਵੀ ਜਿੱਥੇ ਜਾਣੇ ਅਸੀਂ ਕਿਤੇ ਜਿਵੇਂ ਉਹ ਲਿਖਿਆ ਹੋਇਆ ਹੈ ਇਹਦੇ ਜੋ ਜਨ ਫਲਾਣਾ ਦੱਸਣਾ ਹੈਗਾ ਸਾਜੂ ਇਹ ਜਿਹੇ ਅਹੀ ਅਵਸਥਾ ਹੈਗੀ ਆ ਤੁਸੀਂ ਸਮਝੋ ਸਰਗਾ ਕਿ ਜਨਮਾਨਕ ਬੋਲੇ ਸੱਚ ਨਾਮ ਸੱਚ ਸੱਚਾ ਸਦਾ ਨਾਮੇ ਜਿਹੜਾ ਹੈਗਾ ਨਾਨਕ ਦਾ ਨਾਨਕ ਦਾ ਸੱਚ ਦੀ ਗੱਲ ਸੱਚ ਦਾ ਹੁਕਮ ਜਿਹੜਾ ਫਰਮਾਨ ਉਹ ਦੱਸ ਰਿਹਾ ਹੈ ਵੀ ਆਵਾਸ ਤੋਂ ਦਈਏ ਇਹ ਬੁੱਧ ਕੇ ਚੱਲਿਓ ਤੁਸੀਂ ਆਪੇ ਤੁਹਾਨੂੰ ਪਤਾ ਨਹੀਂ ਕਿੱਥੇ ਖੜਾ ਠੀਕ ਹੈ ਨਾਮ ਨਾਮਕ ਬੋਲ ਰਿਹਾ ਹੈ ਸੱਚਾ ਸਤ ਨਾਮੇ ਜਿਹੜਾ ਸੱਚ ਹੁੰਦਾ ਹੈ ਉਹਦੇ ਅੱਗੇ ਸੱਚਾ ਪੁਰਖ ਹਮੇਸ਼ਾ ਹੀ ਦੀਵਾ ਹੋ ਕੇ ਰਹਿੰਦਾ ਹੈ ਸੱਚ ਖਾਸਮ ਸੱਚਾਰੇ ਜਿਹੜੇ ਹੁੰਦੇ ਨੇ ਗੁਰੂ ਖੁਦ ਦੇ ਨੇ ਉਹ ਸੱਚ ਦੀ ਬਰਾਬਰੀ ਨਹੀਂ ਕਰਦੇ ਸੱਚ ਤੋਂ ਦੀਵੇ ਹੋ ਕੇ ਚੱਲਦੇ ਦੀਵੇ ਸੋ ਗੌਰਾ ਹੋਏ ਠੀਕ ਹੈ ਇਹ ਦੀ ਸੈਂਸ ਚ ਆਏਗਾ ਦੀ ਸੈਂਸ ਹੈ ਜੀ ਇਹ ਸਾਡੀ ਵੀ ਜਿਵੇਂ nabla keh rehna nab lafuz hai divo hun da niva hun da satkaar hai theek hai ji nive ho ke chalde haan eh punjabi jinne ashi banaya hai shabda shukr de vich hindi ch nave lafz theek hai ji Punjabi asi banaya leya chhari koro